ब्रह्म ज्ञानी सर्व सृष्टि सब सृष्टि का करता ब्रह्म ज्ञानी सब सृष्टि का करता सारी सृष्टि का करता सारी सिद्धता करता ब्रह्म ज्ञानी है जो ब्रह्म पूर्ण ब्रह्म की इच्छा ओदे नाल सृष्टि पैदा ਕਰਕੇ ਉਦਿਕ ਕਿੰਨੇ ਨੀ ਦੀ ਇਹ ਕਿਹਦਾ ਅੰਤਵਾਰ ਹੈ ਉਦਿਕ ਕਿੰਦਾ ਅੰਤਵਾਰ ਹੈ ਕਰਤੇ ਦਾ ਕੋਈ ਅੰਤਵਾਰ ਨਹੀਂ ਐਨਾ ਹੀ ਪਤਾ ਸਾਨੂੰ ਨਹੀਂ ਦੱਸਦਾ ਬਸ ਬ੍ਰਹਮ ਗਿਆਨੀ ਦਾ ਕਰਤਾ ਕੌਣ ਹੈ ਨਹੀਂ ਬਟਾ ਬ੍ਰਹਮ ਗਿਆਨੀ ਦਾ ਕਰਤਾ ਬ੍ਰਹਮ ਗਿਆਨੀ ਦਾ ਪਤਾ ਲੇਕਿਨ ਬ੍ਰਹਮ ਗਿਆਨੀ ਦਾ ਕਰਤਾ ਕੌਣ ਹੈ ਨਹੀਂ ਪਤਾ ਬਰਤਵਰਤ ਹੋ ਗਿਆ ਅਸਪਾਸ ਜਾਣੋਗੇ ਜਿਹਾ ਸਭ ਪਤਾ ਹੋਵੇ ਪਰ ਗਿਆਨੀ ਅਗਰ ਉਹ ਗਿਆਨ ਨੂੰ ਵੀ ਬਣਾਇਆ ਹੈ ਜਿਵੇਂ ਬਣਾਇਆ ਹੈ ਵਨ ਬ੍ਰह्म ਗਿਆਨੀ ਸਦ ਜੀਵੇ ਨਹੀਂ ਮਰਦਾ ਗਿਆਨੀ ਸਦ ਜੀਵੇ ਨਹੀਂ ਮਰਦਾ ਇਹ ਬ੍ਰਹਮਾ ਨ ਬ੍ਰਹਮਾ ਹਲਦਾ ਨਾ ਬ੍ਰਹਮਾ ਰਬੂ ਕਹਿੰਦਾ ਹੈ ਸਿਕਰ ਨੂੰ ਕਰ ਦਿੰਦੇ ਆਂ ਰਬੂ ਕਹਿੰਦੇ ਸਦੀਵੇ ਨਹੀਂ ਮਰਦਾ ਰਬੂ ਕਹਿੰਦੀ ਸਦਾ ਜੀਵੇ ਸਦਾ ਜੀਉਂਦਾ ਉਹਦੀ ਮੱਤਾ ਤੱਕ ਸੰਦਾਨੀ ਕਦੇ ਮੱਤਾ ਦਾ ਸੰਦਾਨੀ ਕਦੇ ਸੋਣੀ ਵਰਨ ਸੋਣਾਂ ਨਾਲ ਰਬੂ ਕਹਿੰਦੇ ਮੁਕਤ ਜੁਗਤ ਜੀ ਕਾ ਦਾਦਾ परंग्याने मुक्त जुक्त जी का दाता मुक्ति दा दाता चित्तंग एक मुक्ति दी जुक्ति दाता भी है मुक्ति दी जुक्ति करवाणी है छुटण की वेदाई नहीं मुक्ति दा दाता भी है मुक्ति दी जुक्ति दा दाता भी मुक्ति दी जुक्ति दा दाता दसी है मुक्ति ने दसी है ना मुक्ति जे दस के कोई कमावी लवे फिर भी ਜਦ ਨਾਲ ਜਰ नहीं करता ਨਹੀਂ मिलती ਮੁਕਤੀ ਮਿਲਦੀ ਦੀ ਪਰ ਉਹ ਗਿਆਨੀ ਦਾ ਕੋਰਸ ਵੀ ਉਹ ਨਹੀਂ ਦੱਸਿਆ ਲਿਖਿਆ ਪਰ پاس ਵੀ ਆਪੇ ਕਰਦਾ ਮਤਲਬ ਇਹ ਹੈ پاس ਵੀ ਉਹਨੇ ਕਰਨਾ ਇਹ ਥੋੜੀ ਐ ਕੋਰਸ ਕਰਤਾ ਉਹ ਕੁਰਬਾਨੀ ਦਿੱਤੀ ਉਹ ਸਾਰੇ ਪੜ੍ਹ ਕੇ ਮੁਕਤ नहीं ਜਾਂਦੇ ਨੇ ਤੇ ਕੌਣ ਪ੍ਰਾਪਤ ਕਰ ਗਿਆ ਕੌਣ ਨਹੀਂ ਇਹਦਾ ਫੈਸਲਾ ਵੀ ਤਾਂ ਕਾਲਪਿਛੇ ਸਿੰਪਟਮ ਵੀ ਦੱਸੇ ਜੇ ਇਹ ਜਦੋਂ ਸਟਾਰਟਿੰਗ ਕੀਤੀ ਅਸਪੜੀ ਹੋਣੇ ਵਾਲੀ ਹਾਂ ਉਹਦੇ ਲੱਛਣ ਭ੍ਰਮ ਗਿਆਨੀ ਪੂਰਨ purkh ਵਿਦਾਤਾ ਭ੍ਰਮ ਗਿਆਨੀ ਨੂੰ ਪੂਰਨ purkh ਵਰ ਇਹੀ ਹੈ ਜਿਹੜਾ ਵਿਦਾਤਾ ਸ਼ਬਦ ਹੈ ਸਾਡਾ ਸੁਦਾਤਾ ਸੀ ਬੋਲਦੇ ਹੋ ਇਹ ਪੂਰਨ purkh ਜਿਹਨੂੰ ਕਹਿੰਦੇ ਹੋ ਉਹ ਇਹੀ ਪਰ ਜਾਨੀ ਨੀ ਬੋਲ ਬੋਲਦਾ ਤਾਂ ਜਿਹੜਾ ਬਾਹਰ ਸਾਡੇ ਕੋਲ ਬਣ ਪਿਆਨੀ ਆ ਦੇ ਕਰਕੇ ਸਲੀਬ ਕਰਕੇ ਉਹ ਕੋਲ ਬੋਲ ਬੋਲਦਾ ਜੀ ਆ ਪਰ ਇਹਦਾ ਸਵਾਰ ਉਹਦਾ ਨਿਸ਼ਵਾ ਕੋਈ ਇਹ ਤਾਂ ਉਹਦਾ ਮਸਲ ਕਰਨ ਵਾਲਾ ਹੀ ਆ ਸਰੀਰ ਛੱਡ ਕੇ ਹੋ ਜਾਈਏ ਜਿਨਾ ਜਦ ਸਰੀਰ ਆ ਉਹਨਾਂ ਜੋ ਜੀ ਇਹਨਾਂ ਜਿਹਨੂੰ ਬ੍ਰਮਗਣੀ ਕਹਿ ਨਹੀਂ ਸਕਦਾ ਕਹਿ ਸਕਦਾ ਐਨਡ ਕੈਸ ਕਰਦੇ ਆਂ ਕੁਰਾਨ ਜਿਹੜੇ ਇੰਨੇ ਨਾਰਕਡਿਸ਼ਨੋਂ ਮਿਲਦੀਆਂ ਜਿਵੇਂ ਸ੍ਰਿਸ਼ਟੀ ਦਾ ਕਰਤਾ ਨਹੀਂ ਕੁਛ ਸਬਤ ਹੈ ਕੁਛ ਨਹੀਂ ਹੈ ਹੋਰ ਜਾਣੇ ਤੇ ਕੈਸ ਕਰਦੇ ਕੁਛ ਸਬਤ ਹੈ ਉਹਦੇ ਸ੍ਰਿਸ਼ਕਾ ਕਰਤਾ ਨਹੀਂ ਕਹਿੰਦਾ ਇਸੇ ਕਰਕੇ ਜੀਓ ਕੁਛ ਕਰਨਾ ਹੈ ਸਿਆਣ ਹੈ ਬੜੀਆ ਜਨਾਨੀ ਹੋੜੀਆਂ ਜਾਂ ਸਰਦਾਰ ਕੁਛ ਕੁਝ ਲੱਛਣਾਂ શરીਰੇ ਤੇ ਵਿਚ ਰਹਿੰਦੇ ਕਮੀ ਹਾਂ ਕੁਝ ਲੱਛਣਾਂ ਹਾਂ ਉਹ ਹੈਗਾ ਨਾ ਕੁਝ ਕੀ ਬ੍ਰਹਮਾळे ਲੱਛਣ ਤਾਂ ਤੇ ਦੇ ਹਾਂ ਬ੍ਰਹਮਾळे ਲੱਛਣ ਤਾਂ ਗਿਆਨੀ ਆਲੇ ਲੱਛਣ ਜਿਹੜੇ ਉਹ ਨਹੀਂ ਕਿਉਂਕਿ ਸਿਸ਼ਟੀ ਕਰ ਰਚਨਾ ਗਿਆਨ ਨਾਲ ਹੋ ਜਾਈਂ ਬ੍ਰਹਮਾळे ਕੋਣ ਹੈ ਤੇ ਕੋਈ 희 ਹੋਵੇ ਸਾ ਹੈਗੇ ਨੇ ਗਿਆਨੀ ਆਲੇ ਕੋਣ ਨਹੀਂ ਜੱਤ ਗਿਆਤ ਉਹਨਾਂ ਦਾ ਦੱਸਿਆ ਹੋਇਆ ਬੋਲ ਰਿਹਾ ਧੁਰਕੀ ਬਾਣੀ ਸੁਣ ਕੇ ਬੋਲ ਰਿਹਾ ਜਾਂ ਦੇ ਰਿਹਾ ਗਿਆਨੇ ਆਲਾ ਪੱਖ ਇਹਦੇ ਕੋਲ ਨਹੀਂ ਹੈ ਬ੍ਰਹਮਾळे ਪੱਖ ਹੈ ਬ੍ਰਹਮਦੇ ਵਿੱਚ ਪੂਰ ਬ੍ਰਹਮ ਜੋ ਹੋਇਆ ਉਹ ਵੀ ਪੱਖ ਸਾਡੇ ਕੋਲ ਗਿਆਨ ਨਾਲ ਆਇਆ ਹੈ ਹਾਂ ਸਭ ਝਾ ਲੈ ਉਦੇ ਬਾਅਦ ਬੋਣਗਰਮ ਤਾਂ ਹੋਇ ਗਿਆ ਬੋਣਗਰਮ ਨੂੰ ਗਿਆਨੀ ਜ਼ਰੂਰ ਕਿਹਾ ਅੱਲਾਹ ਗਿਆਨੀ ਰਖਦਾ ਹੈ ਉਹ ਤਾਂ ਬ੍ਰਹਮ ਗਿਆਨੀ ਨਹੀਂ ਹੈ ਉਹਦੇ ਬਾਅਦ ਕੀ ਆਨੇ ਤੁਹਾਨੂੰ ਨਾਮ ਹੈ ਜਿਹੜਾ ਸ਼ਬਦ ਜਾਣ ਜਾਣਾ ਉਹ ਗਿਆਨੀ ਵਾਸਤੇ ਆਇਆ ਵਿਅਕਤੀ ਵਾਸਤੇ ਹੈ ਸ੍ਰਮ ਗਿਆਨੀ ਦੇ ਵਾਸਤੇ ਹੈ ਜੇ ਤੋ ਬਾਅਦ ਉਹ ਸਾਰਾ ਸੱਚ ਖਣ ਵਾਲੇ ਆਸਈ ਜੱਜ ਰੋਲਾ ਸਿਰਸਕਾ ਕਰਤਾ ਹੋਏ ਸਿਰਸਕਾ ਕਰਦਾ ਇਹਦਾ ਸੇਜੀ ਦੇ ਵਿੱਚ ਆਇਆ ਕਰਤਾ ਕਰਿਆ ਇਹਦਾ ਸੇਜੀ ਦੇ ਵਿੱਚ ਆਇਆ ਇਹ ਤਾਂ ਬਸਾ ਪ੍ਰਾਪਤ ਹੈ ਤਾਂ ਨਹੀਂ ਇਹਨੇ ਲਾ ਹਾਂ ਇਹਨੇ ਉੱਥੇ ਪਹੁੰਚਣਾ ਇਹਨੇ ਮਿਲ ਗਈ ਇੱਕ ਸੁਰਤੈ ਕੋ ਗਿਆ ਸੁਰਤਾਦਨਾ ਹੋਗੀ ਪਰ ਅਜੇ ਸ਼ਰੀਰਤਾ ਹੈ ਮਾਇਆ ਦੇ ਵਿੱਚ ਬਹੁਤ سارے ਸਵਾਲ ਨੇ ਇੱਥੇ ਜਿਹੜੇ ਕੋਲ ਨਹੀਂ ਆ ਗਿਆ ਮਾਇਆ ਦੇ ਜਿਹੜੇ ਸਾਰਾ ਗਿਆ ਲੱਖਾਂ ਸਵਾਲ ਨੇ ਮਾਇਆ ਦੇ ਜਿਹੜੇ ਪਤਾ ਨਹੀਂ ਜਿਹੜਾ ਆਦਮੀ ਆ ਗਿਆ ਰੱਖਦਾ ਆਤਮ ਗਿਆਨ ਦੀ ਬਾਰੇ ਮਾਇਆ ਦੇ ਕਰੋੜਾਂ ਸਵਾਲ ਨੇ ਜਿਹਦਾ ਇਥੇ ਕੋਲ ਜਵਾਬ ਨਹੀਂ ਇਦੋਂ ਕਹਿੰਦੇ ਕਿ ਹੋ ਗਿਆ ਆਤਮ ਗਿਆਨ ਨਹੀਂ ਹੋਇਆ ਹੈ ਜੇ ਆਤਮ ਗਿਆਨ ਦੀ ਗੱਲ ਨਹੀਂ ਆਸੀ ਬ੍ਰਹਮ ਗਿਆਨ ਜਿਹਨੂੰ ਕਹਿੰਦੇ ਆ ਇਹਨੂੰ ਆਤਮ ਗਿਆਨ ਨਹੀਂ ਉਹ ਬ੍ਰਹਮ ਕਹਿੰਦੀ ਆਪਣਾ ਗਿਆਨ ਹੈ ਨੂੰ ਬ੍ਰਹਮ ਬਾਰੇ ਗਿਆਨ ਹੈ ਮਾਇਆ ਬਾਰੇ ਗਿਆਨ ਇਸ ਕੇ ਕਰਤੇ ਵਾਲਾ ਕੋਈ ਨਹੀਂ ਹੈ ਬੁਖਤਜੁਗਤ ਜੀ ਕਾ ਦਾਤਾ ਨਹੀਂ ਹੈ ਉਹ ਜਾਂ ਇਹ ਕੋਣ ਲੈ ਲੈਣ ਨੇ ਜਬਰਦਸਤੀ ਲੈ ਹੋਏ ਜਿੰਨੇ ਕੋਣ ਆ ਸਕਦੇ ਨਾ ਦੱਸਦੇ है ਨਹੀਂ ਆ ਸਕਦੇ ਲੈ ਹੋਏ ਨੇ ਉਹ ਉਹ ਵੱਖਰੇ ਕੀਤੇ ਨੇ ਬੜਾ ਮੁਸ਼ਕਲ ਆਇਆ ਗੱਲ ਅੱਛੇ ਮੈਂ ਤਾਂ ਬ੍ਰਹਮਗਣੀ ਆ ਰਹੀ ਜਿਹੜੀ ਇਹ ਪੰਤੀ ਇਥੋਂ ਕਈ ਥਾਂ ਹੀ ਤੇ ਕਈ ਵਾਰੀ ਤਾਂ ਲੱਗਦਾ ਵੀ ਉਹ ਜਿਹੜੀ ਛੋਹ ਹੈ ਦਰਖਤ ਦੀ ਹੈ ਤਾਂ ਇਹ ਕੋਈ ਉਪੂ ਹੋਈ ਨਹੀਂ ਉਹ ਤੇਜਤ ਰਸਤ ਪਰ ਉਸ ਤੋਂ ਦੱਤਾਂ ਥੋੜੀ ਤੋੜ ਲੂਗਾ ਛੋਹ ਜੋ ਨਾ ਕੋਈ ਥੋੜੀ ਤੋੜ ਲੂਗਾ ਤਾਂ ਫਿਰ ਥੋੜੀ ਤੋੜ ਲੂਗਾ ਸਮਨ ਥੋੜੀ ਆ ਜੂਚੋਂ ਛੋਹ ਜੋ ਦਰਸ ਚੋ ਉਸਮਨ ਦਾ ਰੂਪੇ ਰੂਪਾ ਉਹ ਤਾਂ ਕੋਰ ਰਾਗ ਰੁਕਦਾ ਹੋ ਜਈਆ ਸੋ ਆਦਾ ਹੋ ਜਈਆ ਪਰ ਦੇ ਨਹੀਂ ਸਕਦਾ ਦੇ ਨਹੀਂ ਸਕਦਾ ਦੱਸ ਸਕਦਾ ਮੁਕਤੀ ਦੇ ਨਹੀਂ ਸਕਦਾ ਦੱਸ ਸਕਦਾ ਮੁਕਤੀ ਨੂੰ ਕਿ ਐਕਸਪਲੈਨ ਕਰ ਸਕਦਾ ਦੇ ਨਹੀਂ ਸਕਦਾ ਉਹ ਦੇ ਨਹੀਂ ਸਕਦਾ ਦੱਸੀ ਅਸਰਜਾ ਉਹ ਨਹੀਂ ਦੱਸੀ ਹੋਈ ਦੱਸ ਸਕਦਾ ਹੈ ਇਹ ਸਿੱਧਾ ਤਾਂ 10 ਵਜੇ ਸਕਦਾ ਇਹ ਤਾਂ ਬੁਲਾਇਆ ਹੀ ਬੋਲ ਸਕਦਾ ਦਸਾਂ ਵੇਲੇ ਵੀ ਬੁਲਾਇਆ ਹੀ ਬੋਲਿਆ ਅਸਾਂ ਦੱਸੀ ਵੀ ਇਹਨੇ ਨਹੀਂ ਦਾ ਦਾਤਵ ਦੀ ਦਾ ਦਾ ਇੱਕ ਪਾਸੇ ਜਦੋਂ ਪੁਕਤੀ ਦੀ ਜੁਕਤੀ ਦਾ ਦਾਤਵ ਦੀ ਹੈ ਅਸੇ ਨੇ ਜਾਣਿਆ ਉਹ ਸੁਤਸੀ ਜਿਹਾਜਤ ਕਹਿੰਦੇ ਉਹਦੇ ਵਰਕਾ ਤਨ ਨੂੰ ਉਹੋ ਤੁਸੀਂ ਮੈਂ ਜੈਸਾ ਜੀ ਕਿਹਾ ਹਾਂ ਇਹਨੂੰ ਕਹਿਆ ਜੈਸਾ ਤੂੰ ਤੈਸਾ ਤੂੰ ਹੈ। ਕਿਹਾ ਉਹ ਬਖਸ਼ ਦੇ। ਇਹ ਵੀ ਤਾਂ ਆਪਣੇ ਵਰਗਾ ਆਪਿਆ ਕਰ ਲਈਆ। ਹੋਰ ਹੈ ਦੀ ਕੁਛ? ਅੱਜ ਬ੍ਰਹਮ ਗਿਆਨੀ ਅਨਾਥ ਦਾ ਨਾਸ। ਬ੍ਰਹਮ ਗਿਆਨੀ ਅਨਾਥ ਦਾ ਨਾਸ। ਅਨਾਥ ਕੌਣ ਹੈ? ਅਨਾਥ ਅਵਿਸ਼ਵਾਸਾਤਮਾਨ ਹੈ। ਮਨੁੱਖ ਤੇ ਹੈ। ਨਾਸੀ ਏਹ ਥੋੜੇ ਨਾਥ ਹੈ ਉਹਦਾ ਇਹਦਾ ਮਾਨਾ ਨਾ ਸੀ ਕੋ ਨਾ ਮਨੁੱਖੀ ਨਾ ਹਸਤੇ ਉਹ ਨਾਲਾ ਹੋਣਾ ਨਾਥ ਹੈ ਬ੍ਰह्म ਗਿਆਨੀ ਤੋਂ ਘਟ ਨਾਥ ਨਹੀਂ ਹੋ ਸਕਦਾ ਸੀ ਦੇਖੋ ਜਿਹੜੇ ਨਾਥ ਬਣ ਗਏ ਜਾਂ ਤਾਂ ਉਹ ਹੈ ਦੀ ਨਾਥ ਕਹਣ ਲੱਗੇ ਆ ਗਲਤੀ ਸੀ ਉਹ ਗਿਆਨ ਨਾਨਕ ਜੇ ਸਾਡੇ ਸਾਥ ਸਾਰੇ ਜੇ ਬੰਨ ਜਾ ਤਾਂ ਰੱਬ ਦੇ ਨਾਮ ਤੇ ਆ ਗਿਆ ਰੱਬ ਗਿਆ ਨਾ ਸੁਣ ਲਿਆ ਉਹਨੇ ਨਾ ਜੋੜ ਲਿਆ ਨਾ ਰਹਿ ਗਿਆ ਥੇਮੇ ਜੋੜ ਦੇ ਰਹਿਣਾ ਪਿੱਛੇ ਵੀ ਤੇ ਖਬਾ ਦਾ ਠੇਠਾਂ ਜੋੜ ਲੈਣਾ ਪਹਿਲਾਂ ਉਹ ਫਿਰ ਸਾਰਾ ਇਹ ਜੋ ਕੀਟਕਰਾਇਆ ਹੁੰਦਾ ਨਾ ਅਪਸਟ ਹੋ ਜਾਂਦਾ ਸਾਰਾ ਉਹ ਫਲਸਫੀਓ ਬਿਲਕੁਲ ਅਪਸਟ ਹੋ ਜਾਂਦਾ ਹਾਂ ਬ੍ਰਹਮ ਗਿਆਨੀ ਦਾ ਸਭ ਉੱਪਰ ਹਾਕ ਹੈ ਆਪ ਬ੍ਰਹਮ ਗਿਆਨੀ ਦਾ ਸਭ ਉੱਪਰ ਹਾਕ ਹੈ ਜਿੰਨੇ ਵੀ ਗਿਆਨवान ਜਿੰਨੇ ਵੀ ਬੱਤਾਂ ਦੇਣ ਵਾਲੇ ਸਰ ਦੇਣ ਵਾਲੇ ਗੁਰੂ ਬਣੇ ਹੋਏ ਨੇ ਰਾ ਦੱਸਣ ਵਾਲੇ ਸਿੱਧਾ ਸਾਰਾ ਦੂਰ ਆ ਸਕਦਾ ਸਾਰਿਆਂ ਤੇ ਕਿਰਪਾਉਂਦੀ ਹੋਈ ਹੈ ਜੇ ਕਿਸੇ ਨੇ ਲੈਣਾ ਹੋਵੇ ਉਹ ਉੱਚੀ ਅਵਸਥਾ ਚਾਹੀਦੀ ਆ ਉਹਦਾ ਹੱਥ ਉੱਤੇ ਉੱਥੋਂ ਲੈ ਲਓ ਉਦਾਹਤ ਸਾਰਿਆਂ ਨਾਲ ਉੱਚਾ ਹੈ ਉੱਚੀ ਉਹ ਅਸਟਾ ਗਿਆਨ ਨਾਲ ਫਿਲਾ ਲਓ ਥੱਲੇ ਵੀ ਅਗਾਂ ਦੇ ਬਾਰੇ ਥੱਲੇ ਵੀ ਉਹ ਠਹਿ ਕੇ ਨੇ ਜਿਹੜੇ ਰਸ ਮਿਲਦਾ ਤੇ ਆ ਗਿਆਨ ਮਿਲਦਾ ਛੂਟੀਆਂ ਥੱਲੇ ਵੀ ਨੇ ਸਭ ਤੋਂ ਉੱਚੀ ਟੂਟੀ ਦਾ ਗਿਆਨ ਜਿਹੜਾ ਨਾ ਉਹ ਸਭ ਤੋਂ ਉੱਚੀ ਅਵਸਥਾ ਹੈ ਸੱਦੇ ਦਿਵਸਾ ਲੋ ਮਾਇਆ ਦਾ ਗੰ ਬ੍ਰਹਮ ਗਿਆਨੀ ਦਾ ਸਗਲ ਆਕਾਰ ਬ੍ਰਹਮ ਗਿਆਨੀ ਦਾ ਸਗਲ ਆਕਾਰ ਜਿੰਨਾ ਵੀ ਆਕਾਰ ਦੀਦਾ ਅੱਖਾਂ ਨੂੰ ਅਸਲ ਬ੍ਰਹਮ ਗਿਆਨੀ ਦਾ ਆਕਾਰ ਹੈ ਇਹ ਗੱਲ ਤੁਹਾਡੀ ਓਕੀ ਜੋ ਦਿਨ ਦਾ ਬ੍ਰਹਮ ਗਿਆਨੀ ਦਾ ਆਕਾਰ ਜੋ ਬ੍ਰਹਮ ਰੂਪ ਤੇ ਹੁੰਦਾ ਹੈ ਆਇਆ ਨਹੀਂ ਹੁੰਦੀ ਆਕਾਰ ਦੀ ਮਾਇਆ ਬ੍ਰਹਮ ਰਬਾਂ ਦਾ ਹੰਗਰ ਇਹਨੇ ਮਾਇਆ ਵੀ ਆਪਣੇ ਵਿੱਚੋਂ ਹੀ ਪੈਦਾ ਕੀਤੀ ਛੱਡ ਦਿੱਤੀ ਹਵਾ ਹਵਾ ਬਾਾਰ ਛੱਡੀਏ ਅਕਾਸ਼ ਵਿੱਚ ਛੱਡੇ ਸੱਚੇ ਤੇ ਪਗਣੇ ਵਾਰ ਹੋਇਆ ਅਕਾਸ਼ ਵਿੱਚ ਛੱਡੇ ਅਕਾਸ਼ ੜੋਂ ਖੜਾ ਹਵਾ ਵਿੱਚੋਂ ਸਰਦੀ ਹਵਾ ਕਾ ਇਸਕੂਬ ਦੀ ਪਾਣੀ ਬਗਾਰਾ ਇਤਨੀ ਮਿੱਟੀ ਹੈ ਇਹ ਸਭੇ ਤੋਂ ਬਦਰੋਜੀ ਚਾਰ ਤਤ ਨੇ ਵੱਖਰੇ ਸਕੇ ਸਹੀ ਮਾਇਆ ਇਹ ਚੀਜ਼ ਹਾਂਜੀ ਬ੍ਰਹਮ ਆਕਾਰ ਸ਼ਕਲ ਆਕਾਰ ਹੈ ਜੋ ਅਸਲ ਬ੍ਰਹਮ ਹੀ ਹੈ ਫਿਰ ਗਿਆਨ ਇਹ ਗਿਆਨ ਦਿਓ ਦੇਣਾ ਆਇਆ ਦਾ ਵਿੱਚੋਂ ਪੈਦਾ ਹੋਈ ਆਕਾਰ ਦਾ ਬਾਤ ਬੜੀ ਆ ਆਕਾਰ ਨਾਲ ਜਮੈਂ ਆਕ੍ਰੇ ਤਾਂ ਕਹਿਣਾ ਹੀ ਹਵਾ ਦੀ ਤਾਂ ਕੋਈ ਛੇਪ ਨਹੀਂ ਹਨੇਰੀ ਵੀ ਕੋਈ ਛੇਪ ਨਹੀਂ ਦਾਦੀ ਦੇ ਕੋਸਾਂਦੀ ਆ ਅਗਦੀ ਵੀ ਕੋਈ ਛੇਪ ਨਹੀਂ ਕਿਵਨ ਹੱਥੇ ਦਾ ਜੀਦੀ ਪਾਣੀ ਜਿਹੇ ਪਾਣੀ ਦੇ ਪਾਦੇ ਜਮਾਂਦ ਹੋ ਜਾਈ ਬਣ ਜਾਂਦਾ ਪਾਣੀ ਜੇ ਬਰਫ ਪੜਾਉਣੀ ਆ ਜਿਹੇ ਪਾਦੇ ਨੇ ਜਿਹੜਾ ਆ ਕਾ ਤੁਸੀਂ ਡੋਕੋ ਜਿਹੋ ਜਾਈ ਇਹ ਹਵਾ ਦੀ ਗੱਲ ਹੈ ਜਿਹੇ ਜੀ ਵੀ ਚੀਜ਼ ਆਪਾਂ ਪਰਦੇ ਉੱਤੇ ਪਰ ਜਾਂਦੇ ਥਾਲੀ ਮੈਨੂੰ ਚਾਹੀਦੀ ਥਾ ਬਾਬਾ ਜੀ ਕੋਈ अकारता जी है काटे के का फिर नहीं करना पड़ता है अकारता जटा शरीर बना के सकला बना के सारा आकाश देता है इब्र ज्ञानि दा ही अकार देता है ऐनु करता जेड़ा है करता लब जाया ਕਰਤਾ ਉਹ ਹੈ ਆਕਾਰ ਦੇਣ ਵਾਲਾ ਕੱਤੇ ਦਾ ਮਤਲਬ ਸਾਚੇ ਤੇ ਪਵਨਾ ਪਿਆ ਕਰਤਾ ਜਿਦਾ ਵਰਤਿਆ ਹੋਇਆ ਫਿਰ ਸ੍ਰਿਸ਼ਟੀ ਦਾ ਕਰਤਾ ਹੈ ਜਿੱਥੇ ਜੀਵਾਤਮਾ ਹੈ ਪਈ ਹੈ ਨਾਲ ਮਾਇਆ ਦੇ ਜੋੜੀ ਹੈ ਉੱਥੇ ਕੱਤੇ ਦੀ ਲੋੜ ਪਈ ਹੈ ਉਤੇ ਸੱਚੇ ਤੇ ਪਪਾ ਭਿਆ ਪਪਾ ਤੇ होए ਹੋਏ ਆਪੇ ਹੀ ਉਹ ਤੇ ਕਰਤਾ ਨਹੀਂ ਆ ਉਹ ਤੇ ਗੱਲ ਇੱਥੋਂ ਥੋੜਾ ਜਿਹਾ ਫਰਕ ਪੈ ਜਾਂਦਾ ਆਪਾਂ ਨੂੰ ਤਾਂ ਔਖਾ ਲੱਗਦਾ ਹੈ ਉਹ ਤੇ ਭਿਆ ਕਰਤਾ ਨਹੀਂ ਹੈ ਉਹ ਕਰਤਾ ਜਾਦਾ ਜਾਂ ਚੇਤਨ ਨਾਲ ਜੜ ਦਾ ਜੋੜ ਲਾਉਣਾ ਹੈ ਇੱਥਾ ਚੇਤਨ ਨਾਲ ਜੜ ਦਾ ਹੈਗਾ ਜੋੜ ਲਗਿਆ ਪਰ ਰਲਕਦਾ ਕਿਥੇ ਪਤਾ ਨਹੀਂ ਲੱਗਦਾ ਜੋੜ ਕੇ تھے ਉਹਦਾ ਲਾਇਆ ਹੋਇਆ ਜੋੜ ਹੈ ਕਰਤਾ ਹੈ ਫਿਰ ਛੇਬ ਵੀਆ ਦਰ ਦਤੀ ਹੈ ਜੂਨ ਹੈ ਹਰ ਜੂਨ ਦੇ ਵਿੱਚ ਕਦੂਏ ਨਾਲ ਉਹਨਾਂ ਦੀ ਵੀ ਸ਼ਕਲ ਨਹੀਂ ਮਿਲਦੀ ਹਾਂ ਕਿਰਤਾ ਨਾ ਬਣ। ਜੋ ਕ੍ਰिएशन ਉਹਦੇ ਕਰਦੇ ਕਰਤਾ ਕ੍ਰியேਟਰ ਕਰਤਾ ਉੱਤੇ ਲਬਜ਼ ਕਰਤਾ ਇਹ ਸਾਡੇ ਦੇ ਜੋ ਭਗਵਾਨ ਤੇ ਹੈ ਉਹ ਤਾਂ ਬੱਖਰ ਦੀ ਤਸਵੀਰ ਸੀ ਬਖਰੀ ਕਰਤੀ ਹੋਈ। ਜੋ ਜਗੰਨੈਕਾ ਸਗਲ ਆਤਾਰ ਬ੍ਰਹਮ ਗਿਆਨੀ ਆਪ ਨਿਰੰਕਾਰ لیکن اپ رنگکار اپنا کارو دا ہے نہیں جتنا بھی اکار ہے سب ਗਿਆنی نے پیدا کیتا ہے جڑے شریر نے اوتھے تے اپے بیٹھا برہم تا بیٹھا ہی جا برہم گیان نہیں کر کے جڑا گنوں دے وچ تے برہم گیانی والا شاب سننا دا کام ہے او برہم نے سن کے بنایا او ਕੋਇ ਤਪ ਕਰਦਾ ਲਿਖਿਆ ਤਾਂ ਹੀ ਲਿਖਿਆ ਹੋਇਆ ਹੈ ਸ਼ਬਦ ਨਾਲ ਜੁੜਿਆ ਹੋਇਆ ਸੀ ਅਕਾਰ ਬਣਾਇਆ ਉਹ ਤੁਮ ਫਰਮਾਇਆ ਤਾਂ ਉਹਨੇ ਦੱਸਿਆ ਤਾਂ ਉਹਨੇ ਪੜਾਇਆ ਚਾਹੀਏ ਨਹੀਂ ਹੈ ਸਾਰਜਨਾਂ ਦਾ ਬੀਜ ਮੰਤਰ ਸਰਬੋ ਗਿਆਨ ਜਮੀਨ ਚੋਂ ਜਦੋਂ ਬੀਜ ਛਰਦੇ ਨੇ ਆਪ ਕੋਠਾ ਸਦਾ ਕਿਵੇਂ ਛਰਦੇ ਨੇ ਜਾ ਜਾਂਦਾ ਜਾੜਾ ਆਪੇ ਥੱਲੇ ਨੂੰ ਜਾਂਦੀ ਹੈ چاہے ਜੜੋਂ ਤੋਂ ਬਸੇ ਪੈਦਾ ਹੋਈ ਹੋਵੇ ਜਦ ਥੱਲੇ ਨੂੰ ਜਾਊਗੀ ਉੱਤਰpass ਹੋ ਜ਼ਰੂਰ ਦਾ ਚਾਹੇ ਵੀਜ ਵਟਾ ਲੈ ਕੇ ਆਵੇ ਕੌਣ ਰਹਾਦਾ ਵੀ ਤੂੰ ਉੱਤਰ ਜਾ ਤੂੰ ਥੱਲੇ ਨੂੰ ਜਾ ਉੱਥੇ ਵੀ ਜਾਣ ਹੈ ਉਹ ਬੀਜ ਬੋਲਦਾ ਹੈ ਉੱਤੇ ਵੀਜ ਨਾਲਾ ਮੰਤਰ ਜਿਹੜਾ ਬੀਜ ਨੂੰ ਮੰਤਰ ਹੈ ਉਹ ਬੀਜ ਮੰਤਰ ਹੈ ਜਿਹੜਾ ਬੀਜ ਨੂੰ ਸੁਣਦਾ ਉਹ ਵੀ ਜਿਵੇਂ ਤਰ੍ਹਾਂ ਬਿਨਾ ਕਰਨਾ ਤੇ ਸੁਣਦਾ ਉਹ ਵੀ ਜਿਵੇਂ ਕੋਲੇ ਦੇ ਕਾਢ ਕਿੱਥੇ ਹੁੰਦੇ ਨੇ। ਫੰਗ ਦਾ ਦਰਖਤ ਵੀ ਨੂੰ ਸੁਣ ਲੱਗਦਾ। ਟਾਣੇ ਨੂੰ ਰੋਲੀ ਕਾ ਮਿਲਦੇ ਨੂੰ ਸੁਣਦਾ। ਅ ਦਰਖਤ ਨੂੰ ਬਸ ਉਹਦੇ ਨੂੰ ਪੇੜਾਂ ਨੂੰ ਅਸੀਂ ਕਹਿੰਦੇ ਸੁਣਦਾ ਰਾਂ। ਲੇਕਿਨ ਉਹਦੇ ਵੀ ਨੂੰ ਨਹੀਂ ਸੁਣਦਾ। ਵੀ ਆਲਾ ਬੁੱਤਰ ਹੋਰ ਆ। ਉਹਦੇ ਪੇੜਾਂ ਨੂੰ ਆਉਣ ਵਾਲੀ ਆਵਾਜ਼ ਸੁਣਦੀ ਆ ਫਿਰ। ਬਹੁਤ ਵੇਸ ਹੁੰਦੀ ਹੈ। ਉਹ ਕਿ ਮਾਇਆ ਚ ਹੈ ਉਹ। ਉਹਨਾਂ ਕੋਲ ਜੋ ਕਾਨੂੰਨਿਆ ਗਏ ਉਹ ਉਹਨਾਂ ਨੂੰ ਬੀਜ ਮੰਤਰ ਸੁਣਦਾ। ਵਿਨਾਗਰ ਨਾਵਾ ਇਸ ਹੁਕਮ ਡਾਇਰੈਕਟ ਹੁਕਮ ਸੁਣਦਾ। ਡਾਇਰੈਕਟ। ਜੈ ਜੈ ਭਰਮ ਗਿਆਨੀ ਨੂੰ ਸੁਣਦਾ। ਭਰਮ ਗਿਆਨੀ ਵੀ ਬੀਜ ਰੂਪਈਆ ਹੀ ਆਪ ਨਿਰੰਕਾਰ। ਆਪ ब्रह्म ज्ञानी का सधलाकार जरूर है वोदा लेकिन आप वो ब्रह्म ज्ञानी माया के नहीं है आप अकेले श्री श्री बीच है जे ब्रह्मान एससी बनाई जाए तो ब्रह्मा की देह क्यों है सवाल है परमात्मा नहीं होता मतलब तो ਜੇ ਕ੍ਰिएशन ਬਣਾਇਆ ਹੈ ਤੇ ਸਾਰੀ ਸ੍ਰਿਸ਼ਟੀ ਬਣਾਈ ਹੈ ਆਪ ਇਸ ਸ੍ਰਿਸ਼ਟੀ ਤੋਂ ਬਾਹਰ ਹੈ ਹੋ ਬਣਾਉਣ ਵਾਲਾ ਆਹ ਕਹਿਣਾ ਮਤਲਬ ਆ ਲੇਕਿਨ ਬਣਾਉਣ ਵਾਲਾ ਅਸੀਂ ਸ੍ਰਿਸ਼ਟੀ ਦੇ ਵਿੱਚ ਮੰਨ ਲਿਆ ਇਹ ਗਲਤੀ ਹੈ ਬਣਾਉਣ ਵਾਲਾ ਵਿੱਚ ਕਿਵੇਂ ਆ ਫਿਰ ਨਵਾਂ ਬਣਾਉਣ ਵਾਲਾ ਕੋਈ ਹੋਰ ਹੈ ਕਿ ਬਣਾਉਣ ਵਾਲਾ ਵੀ ਸ੍ਰਿਸ਼ਟੀ ਦੇ ਵਿੱਚ ਹੈ ਤਾਂ ਬਣਾਉਣ ਵਾਲਾ ਤੇ علاوہ ਕੋਈ ਹੋਰ ਹੈ ਉਦਨੇ ਆਪਣਾ ਇਹ ਜੀਨ ਗਾਲ ਗੜਿਓ ਸੁਗੜਮਾ ਪਾਵਾਂ ਇਹਦਾ ਮਤਲਬ ਉਹਨੇ ਬਣਵਾਇਆ ਆ ਪੜਾਇਆ ਹੈ ਆਪ ਹੈ ਸਿਵਾਇ ਕਰਕੇ ਨੂੰ ਕਰਦਾ ਹੈ ਇਹਨੂੰ ਚਲੋ ਇਹ ਸਰੀਰ ਕਰਕੇ ਇਹ ਡਿਵੈਲਪ ਹੋ ਰਿਹਾ ਇਹਨੇ ਪੂਰਨ ਬ੍ਰਹਮ ਗੁਰੂਣਾ ਸਰੀਰ ਚ ਬੋਲਦਾ ਪੂਰਣ ਕਰਕੇ ਦਾ ਪਤਾ ਲੱਗਦਾ ਇਹ ਬਲੂਪ ਤਾਂ ਦੰਦਾ ਸਾਨੂੰ ਵੀ ਹੈਗਾ ਕੁਝ ਉਹਦਾ ਬਲੂਪ ਨਹੀਂ ਦੰਦਾ ਉਹ ਤਾਂ ਕਿਸੇ ਤਰੀਕੇ ਨਾਲ ਸਾਡੇ ਨਾਲ ਜਿੰਨਾ ਸਾਡੇ ਕੋਲ ਗਿਆਨ ਦਰੇ ਨੇ ਸਾਡੇ ਅੱਖਾਂ ਹੋਈਆਂ ਕੱਲ ਹੋਇਆ ਨਾ ਖੋਇਆ ਬੁੱਧ ਹੋਈ ਉਹ ਤਾਂ ਇਹ ਸਾਰੇ ਪਕੜਦਾ ਹੀ ਪਰੇ ਬੈਠਾ ਘੋਲ ਘੋਲ ਮੈਂ ਪਕੜਦਾ ਹੈ ਭਈ ਜੀਵ ਪਕੜਦਾ ਹੈ ਡਾਕਟਰ ਕਹਿੰਦਾ ਵੀ ਹੁਣ ਡੱਡਾ ਵੇ ਲੈ ਜੋ ਚਾਹੇ ਨਹੀਂ ਦੇਖਿਆ ਉਹਨੇ ਕੀਤੀ ਸੀ ਕਹਦਾ ਦੁੱਧ ਨਾ ਵੀ ਹੁਣ ਹੈ ਨਹੀਂ ਹੋਈ ਆਪਾਂ ਨੂੰ ਵੀ ਪਤਾ ਨਹੀਂ ਕਿਉਂ ਨਾ ਹੈ ਨਹੀਂ ਕੁਝ ਸਬੂਤ ਤਾਂ ਹੈ ਆਪਣੇ ਕੋਲ ਲੇਕਿਨ ਉਹਦਾ ਰੂਟੇ ਕੋਈ ਨਹੀਂ ਜਦੋਂ ਸਬੂਤ ਹੋਇਆ ਤਾਂ ਉਹ ਦੇਰ ਹੁੰਦਾ ਦਸ ਸੂਤ ਸੂਤ ਉਹ ਬੜਾ ਹੋ ਜਾਂਦਾ ਹੈ ਹਾ ਅਜਿਹਾ ਬ੍ਰਹਮੇ ਦੇ ਸੂਤ ਹੈਗੇ ਆ ਹਾਂ ਬ੍ਰਹਮਾ ਉਹ ਬ੍ਰਹਮੇ ਦੇ ਸੂਤ ਹੈਗੇ ਆ ਹਾ ਉਹ ਤਾਂ ਹੈ ਜੇ ਬ੍ਰह्मਗਿਆਨ ਦੇ ਸੂਤ ਨੇ ਜੇ ਗਿਆਨ ਦੇ ਵਿਟੜਾ ਦੱਸਦਾ ਬਸ ਹੋਰ ਥਿਸ ਬੂਤ ਕੋਈ ਜਿਹੜਾ ਭਾਲਾਂਗੇ ਉਹ ਨਹੀਂ ਹੈ ਫਿਰ ਵੀ ਉਹ ਇੱਕ ਆਵਾਜ਼ ਨਾਲ ਪਤਾ ਨਹੀਂ ਕਿੰਨੇ ਵੱਡੇ ਬੋਲਦੇ ਨੇ ਇੱਕ ਅੱਲਾ ਇਹ ਬੁਲਾਇਆ ਬੋਲਦਾ ਅਹਿ ਜ਼ੂਦਦਾ ਹੋਰ ਕੋਈ ਜ਼ੂਦਦਾ ਬ੍ਰह्म ਗਿਆਨੀ ਕੀ ਸੋਭਾ ਬ੍ਰह्म ਗਿਆਨੀ ਬਣੀ ਬ੍ਰह्म ਗਿਆਨੀ ਕੀ ਸੋਭਾ ਜੇ ਬ੍ਰह्म ਗਿਆਨੀ ਦੀ ਸੋਭਾ ਹੈ ਉਹ ਬ੍ਰह्म ਗਿਆਨੀ ਬਣ ਕੇ ਸਤਸਾਚ ਚ ਪ੍ਰਗਟ ਹੋਈ ਹੈ ਆਦ ਵੀ ਜ਼ਰੂਰੀ ਬ੍ਰह्म ਗਿਆਨੀ ਦੀ ਜਿਹੜੀ ਸੋਭਾ ਹੈ ਆ ਸੋਭਾ ਕੀਤੇ ਬ੍ਰह्म ਗਿਆਨੀ ਬ੍ਰह्म ਗਿਆਨੀ ਦੀ ਸੋਭਾ ਕੀਤੀ ਹੈ ਇਹ ਜਿਹੜੀ ਬੇਕਤੀ ਦੀ ਸੁਪਾ ਕੱਟੀ ਹੋਈ ਉਹ ਬ੍ਰਖ ਜਿਹੜਾ ਬ੍ਰਮਾ ਘਟਿਆ ਗਿਆ ਉਹਨੇ ਸਿਸ਼ਟਾ ਕਰਤਾ ਸਿਰਫ ਇਹਦੇ ਵਿੱਚ ਨਹੀਂ ਹੈ ਇਹ ਗੱਲ ਬਈ ਕਹੀ ਹੋਈ ਸਮ ਵਿਚਾਰ ਸਕਦੇ ਵਿੱਚ ਅਗਹੀ ਹੋਈ ਗੱਲ ਹੈ ਜਿਹੜੀ ਇਹ ਸੁਪਾ ਹੈ ਉਸਤੀ ਹੈ ਪਰ ਗਿਆਨੀ ਦੀ ਉਸਤੀ ਹੈ ਜਿਹੜੀ ਦਰੋਲ ਉਹ ਉਹੀ ਬ੍ਰਹਮ ਗਿਆਨੀ ਬਣੇ ਆ। ਉਹੀ ਬ੍ਰਹਮ ਗਿਆਨੀ ਕਹਾਇਆ, ਉਹੀ ਬੁੱਧੀ ਬ੍ਰਹਮ ਗਿਆਨੀ ਕਹਾਇਆ, ਸੋਭਾ ਕਰਨ ਵਾਲੀ ਅਕਲੀ ਬ੍ਰਹਮ ਗਿਆਨੀ। ਉਹ ਬ੍ਰਹਮ ਗਿਆਨੀ ਸੋਭਾ ਕਰਨ ਵਾਲੇ ਨੂੰ ਬ੍ਰਹਮ ਗਿਆਨੀ ਕਹਿਣ ਲੱਗੇ। ਗੁਰੂ ਦੀ ਸੇਵਾ ਕੀਤੀ, ਗੋਬਿੰਦ ਸਿੰਘ ਉਹਨਾਂ ਨੂੰ ਗੁਰੂ ਕਹਿਣ ਲੱਗੇ। ਉਹ ਬ੍ਰਹਮ ਗਿਆਨੀ ਦੀ ਸੋਭਾ ਕਰਨ ਵਾਲੇ ਨੂੰ ਬ੍ਰਹਮ ਗਿਆਨੀ ਕਹਿਣ ਲੱਗੇ। ਅਸੀਂ ਉਹਨੂੰ ਕਹਿ ਦਿੰਦੇ ਹਾਂ ਹੁਣ। ਬ੍ਰह्मਗਾਨੀ ਬਣੀ ਕਿਉਂਕਿ ਉਹਦੀ ਸੋਭਾ ਬ੍ਰह्म ਗਿਆਨ ਕਰਾਉਣ ਵਾਲੀ ਵਸਤੂ ਬਣੀ ਬ੍ਰह्मਗਾਨੀ ਬਣੀ ਆਦਿ ਫਿਰ ਵੀ ਬ੍ਰह्मਗਾਨੀ ਨਹੀਂ ਹੈ ਉਹਦੀ ਜਿਹੜੀ ਸੋਭਾ ਕਰੀ ਹੋਈ ਆ ਉਹਦੇ ਵਿੱਚੋਂ ਜਿਹੜੇ ਗੁਣ ਗਾਇਨ ਕੀਤੇ ਬ੍ਰह्मਗਿਆਦੀ ਦਾ ਉਹ ਤੋਂ ਜਿਹੜਾ ਗਿਆਨ ਬਣਣਾ ਸੋਭਾ ਇਸ ਦਾ ਸਮਝ ਆਉਣਾ ਉਹ ਨਾ ਇਹ ਬ੍ਰਮ ਗਿਆਨ ਵਰਨਾ ਤੋਂ ਲੈ ਕੋਲ ਉਹੀ ਚੀਜ਼ ਬ੍ਰਮ ਗਿਆਨ ਤੋਂ ਟੋੜੇ ਬ੍ਰਮ ਗਿਆਨ ਰੱਖਣ ਵਾਲਾ ਬ੍ਰਮ ਗਿਆਨ ਦੀ ਬੱਤ ਦਾ ਘੜਾ ਮੂਹ ਦੇ ਕੇ ਬ੍ਰਮ ਗਿਆਨ ਨਹੀਂ ਮਣਝੂ ਕੋ ਦੇ ਨਾਲ ਹੀ ਬ੍ਰਮ ਗਿਆਨ ਦੀਆਂ ਜੇ ਸੋਪਾ ਉਹਦੇ ਪਕੜ ਚਾਹੀ ਸੋਪਾ ਨੇ ਸੁਝ ਲਈ 부ਝ ਲਈ ਜੋ ਕੋ ਸੋਪਾ ਕਹਾ ਹੋਇਆ ਫਿਰ ਉਹ ਬ੍ਰਮ ਗਿਆਨ ਬਣ ਫਿਰ ਧੂਆ ਵੀ ਬ੍ਰਮ ਗਿਆਨ ਹੀ ਹੋ ਜਾਂਦਾ ਹੀ ਬ੍ਰਮ ਗਿਆਨ ਦੀਆਂ ਫਿਰ ਵੀ ਬਾਣੀ ਗੁਰੂ ਦੇਖੋ ਉਹ ਤੇ ਸੋਭਾ ਕਹੇ ਤਾਂ ਉਹ ਤੇ ਬਾਣੀ ਕਹੇ ਤਾਂ ਸੋਭਾ ਬਾਣੀ ਹੋਈਆਂ ਉਹ ਸੋਭਾ ਬਾਣੀ ਹੋਈਆਂ ਬਾਣੀ ਗੁਰੂ-ਗੁਰੂ ਆ ਬਾਣੀ ਉਹ ਤੇ ਸੋਭਾ ਬਾਣੀ ਦੋਰੀ ਤੇ ਸੋਭਾ ਕਹੇ ਤਾਂ ਉਹ ਬਣ ਜਾਂਦਾ ਜੇ ਉਹ ਤੇ ਗੁਰੂ ਕਹਤਾ ਤੇ ਬ੍ਰਹਮਿਆਣੀ ਦੀ ਸੋਭਾ ਬ੍ਰਹਮਜਾਤੀ ਬਣੀ ਉਥੇ ਬਾਣੀ ਗੁਰੂ ਗੁਰੂ ਹੈ ਬਾਣੀ ਜੇ ਉਹ ਨਹੀਂ ਫਿਰ ਵੀ ਬ੍ਰਹਮ ਕਹਿੰਦੀ ਹੈ ਜੀ ਜੇ ਉਹ ਨਹੀਂ ਫਿਰ ਵੀ ਬੋਲਦੇ ਨਾਨਕ ਬ੍ਰਹਮ ਗਿਆਨੀ ਸਰਬਕਾਤਰ ਦੀ है ਬ੍ਰਹਮ ਗਿਆਨੀ ਸਰਬਕਾਤਰ ਦੀ ਇਹ ਵੀ ਗੱਲ ਤਾਂ ਜਿਹੜਾ ਬ੍ਰਹਮ ਗਿਆਨੀ ਆ ਉਹ ਸੱਚ ਇਹ ਤਾਂ ਹੀ ਸੱਚੀ ਗੱਲ ਸਰਬਕਾਤਰ ਨਹੀਂ ਉਮਦਾ ਸਾਰੇ ਕਿਸਮ ਮਤਲਬ ਸਾਰਿਆਂ ਨੂੰ ਉਹ ਗਿਆਨ ਦੇ ਸਕਦਾ ਜੀ ਦੀਵਤਾ ਦੁਨੀਆ ਚ ਜਿੰਨੇ ਵੀ ਦੁਨੀਆ ਦੇ ਵਿੱਚ ਬੁੱਤਾਂ ਨੇ ਦੁਜੀਆਂ ਜਿੰਨੇ ਵੀ ਦੁਜੇ ਅ ਕੁੱਲ ਵੇ ਉਹ ਕਾਲੋ ਕੁਲਾਣੇ ਕੁਲਾਣੇ ਜਿਹੜੀਆਂ ਸਾਰੀਆਂ ਕੁਲਾਣੋਂ ਦਾ ਅਸਰ ਸਾਰੀਆਂ ਕੁਲਾਣੋਂ ਦਾ ਅਸਰ ਸਾਰੇ ਨੇ ਮਸੂਰ ਦਾ ਧੰਨ ਅਸਰ ਕੋ ਕੌਣ ਤਾਂ ਯਾਦ ਭੰਗ